ਰੋਕ ਠਾਕ ਨਾ ਹੋਤੀ ਤੈਨੂੰ ਦਰ ਜੇ ਹੋਗਾ ਸੋ ਪਰਸਾਨ ਠਾਕ ਨਾ ਹੋਤੀ ਤੈਨੂੰ ਧਾਰਨ ਸੱਚਖੰਡ ਦੇ ਰਸਤੇ ਦਰਵਾਜੇ ਤੇ ਦਸ ਦੁਆਰ ਤੇ ਉਹਨਾਂ ਨੂੰ ਰਕਾਵਟ ਕਦੇ ਉਹਨਾਂ ਨੂੰ ਕੋਈ ਲੱਗੇ ਤੂੰ ਚੱਲੇ ਕੋਈ ਕੌਣ ਹੋ ਤੁਸੀਂ ਉਹਨਾਂ ਨੂੰ ਕੋਈ ਰੋਕਦਾ ਨਹੀਂ ਟੋਕਦਾ ਨਹੀਂ ਹੈ ਠਾਹੋੜੀ ਟੋਕਣਾ ਰੋਕ ਟੋਕ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਗੁਰਮ ਖਾਏ ਜਾਏ ਨਿਸਾਨ ਦਸਾਂਜੋ ਉਹਨਾਂ ਨੂੰ ਦਰਵਾਜੇ ਤੇ ਕੋਈ ਠਾਕ ਕਾਵਟ ਨਹੀਂ ਚੇ ਮਰਜੀ ਮੈਂ ਅੱਜ ਚਲੇ ਜਾਣਾ ਜਾਂ ਮਰਜੀ ਮੈਂ ਬਾਹਰ ਜਾਣਾ ਇਹ ਨਹੀਂ ਵੀ ਮੈਲ ਚਲੇ ਘਰ ਬਾਹਰ ਆਇਆ ਨਹੀਂ ਥਲਵੇ ਆ ਬਾਹਰ ਆਉਣ ਵਾਸਤੇ ਤੁਹਾਨੂੰ ਬਹੁਤ ਕੁਝ ਅੰਦਰੋਂ ਕਹਿੰਦੇ ਫੋਨ ਕਰਾਉਣਾ ਹੋਵੇ ਆ ਯਾਤ ਲੈਣੀ ਪੁੱਗਣੀ ਤੈਨੂੰ ਡਰ ਜੇ ਹੋ ਗਿਆ ਜਿਹਦੇ ਪ੍ਰਸੰਨ ਹੋਵੇ ਉਹਨੂੰ ਢਾਕੇ ਮੈਂ ਜੋ ਜਨ ਪ੍ਰਭ ਆਪਣੇ ਘਰੇ ਨਾਨਕ ਤੇ ਧੰ ਧੰ ਤੇ ਧਨੀ ਜਿਹੜੇ ਨਾਨਕ ਕਹਿੰਦਾ ਜਿਹੜੇ ਆਪਣੇ ਕਰ ਲੈ ਉਹਨੇ ਉਹਨਾਂ ਨੂੰ ਸਾਰੇ ਖਜ਼ਾਨਾ ਉਹ ਸਾਰੇ ਖਜ਼ਾਨਾ ਇਹਦੇ ਉਹ ਤਾਂ ਨਹੀਂ ਨੇ ਉਨਾ ਕੋਈ ਨਾ ਤਾਣਾ ਕੋਈ ਮਾੜੇ ਨਹੀਂ ਸਕਦਾ ਉਹਨਾਂ ਦੇ ਕੋਈ ਨਾਪ ਨਹੀਂ ਸਕਦਾ ਗਿਆਨ ਨੂੰ ਸੰਸਾਰੀ ਬੰਦਾ ਉਹਨਾਂ ਦੇ ਗਿਆਨ ਨੂੰ ਨਾਪ ਨਹੀਂ ਸਕਦਾ ਗੁਰਬਾਣੀ ਦਾ ਗਿਆਨ ਨਾਪ ਤੋਂ ਪਰੇ ਹੈ ਇਹ ਨਹੀਂ ਨਾਪਿਆ ਜਾ ਸਕਦਾ ਸੰਸਾਰ ਦਾ ਗਿਆਨ ਨਾਪਿਆ ਜਾ ਸਕਦਾ ਸੰਸਾਰੀ ਬੰਦੇ ਦਾ ਗਿਆਨ ਨਾਪਿਆ ਜਾ ਸਕਦਾ ਬਬੇ ਗੋਦੀ ਦੇ ਗਿਆਨ ਨੂੰ ਕੋਣ ਨਾਪ ਲੂਗਾ ਇੱਥੇ ਉੱਚੇ ਤੇ ਉੱਚਾ ਭਗਵਾਨ ਹੈ ਇਹ ਨਹੀਂ ਨਪੇਸ ਨਾਲ ਤੇ ਧਣੀ ਤਨ ਤਨ